ਚ ਲੋਕ चौथा अंतर हर ਹਰ ਗੁਰੂ ਧਿਆਇ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੇ ਸਤਿਗੁਰੂ ਘਟੇ ਨਾਹੀ ਇੱਕ ਤਿੱਲ ਕਿਸੇ ਦੀ ਘਟਾਈ ਘਟਾਈ ਕਿਤੇ ਗੁਰੂ ਨਾਲ ਵਰਤੇ ਹੋਂ ਗੁਰੂ ਹਾਂਜੀ ਔਰ ਅੰਤਰ ਆਇਆ ਕਿਨੇ ਤੇ ਆਇਆ ਹਰ ਦੇ ਅੱਛਾ ਜੀ ਹੋਂ ਵਾਲਾ ਹਰ ਹੂੰ ਹੂੰ ਉਜੀ ਇਸ ਤੇ ਚੱਲਦਾ ਬੰਦੀ ਨਹੀਂ ਹਮਾਰੇ ਉੱਪਰ ਹੈ ਠੀਕ ਹੈ ਜੀ ਮਨ ਤਾਂ ਹਰ ਤਕ ਸੀਧ ਹੋਇਆ ਹੋਇਆ ਹੈ ਅੰਤਰ ਹਾਰ ਅੰਤਰ ਜਿਹੜਾ ਹਰ ਅੰਤਰ ਆਤਮੂ ਦੇਵਾ ਅਰ ਪਰਾਤਮੂ ਇਹਦਾ ਭੂਲ ਹੈ ਜਿਹੜਾ ਇਹ ਬਤਾ ਭੂਲ ਹੈ ਉਹ ਗੁਰੂ ਸ਼ਬਦ ਗੁਰੂ ਜਿਹਦੇ ਜੋੜ ਲੈਂਦੇ ਸਾਰ ਨੂੰ ਤੇ ਆਦਤ ਦੇ ਕੋਲ ਛੱਡ ਕੇ ਧਿਆਨ ਜੁੜਦਾ ਹੈ ਗੁਰੂ ਨਾਲ। ਉਹ ਗੁਰੂ ਸ਼ਬਦ ਗੁਰੂ ਨਾਲ ਧਿਆਨ ਜੋੜਦਾ ਧੁਰਤੀ ਬਾਣੀ ਸੁਣਦੇ ਮਤਲਬ ਹੈ ਇੱਛਾ ਨਾਲ ਅੰਦਰ ਧਿਆਨ ਹੁੰਦਾ ਹੈ। ਅੰਦਰੋਂ ਸੁਧੀਆ ਬਾਣੀ ਗੁਰੂ ਤੇ ਅੱਲਾ ਵੱਡੀ ਵਡਿਆਈ ਬਸ ਐਤੋਂ ਵੱਡਿਆ ਕੋਈ ਵੱਡੀ ਕਿ ਲੋਟੀ ਦੀ ਵੜਾਈ ਹੈ ਜੇ ਗੁਰੂ ਸੁਣ ਜਵੇ ਉਦੋਂ ਸਭ ਤੋਂ ਆਖਰੀ ਅਵਸਥਾ ਇਹ ਹੈ ਜਦ ਅਪਾਰਥ ਸਮਝ ਜਾਣੇ ਇਥੇ ਜਦ ਗੁਰੂ ਦੇ ਨਾਲ ਧਿਆਨ ਉਹਦਾ ਸ਼ਬਦ ਗੁਰੂ ਜੀ ਲੀਨ ਹੋਇਆ ਜਦ ਇਹ ਅਪਾਰਥ ਮਿਲ ਜਾਂਦਾ ਮੋਕਤ ਪਦਾਰਥੋਂ ਮੁਕਤੀ ਛੁੱਟ ਜਾਣੀ ਆ ਜਨ ਪਦਾਰਥ ਮਿਲ ਜਾਣ ਉਪੀ ਥੱਲੇ ਰਹਿ ਜਾਣੀ ਹੈ ਹਾਂਜੀ ਤੁਸ ना तिल एकटा आए, एकटा ही ਸਤਿਗੁਰੂ ਘਟੇ ਨਾਹੀ ਇੱਕ ਤਿਲ ਕਿਸੇ ਦੀ ਘਟਾਈ ਪੂਰੇ ਗੁਰੂ के ਪਰਮేశਰ ਦੇ ਖੁਸ਼ ਹੋ ਕੇ ਇਹ ਅਵਸਥਾ ਦਿੱਤੀ ਹੈ ਜੀ ਨੂੰ ਉਹਦੀ ਅਵਸਥਾ ਅਕਲ ਜਿੱਦੀ ਵੀ ਘਟਾਈ ਹੋਈ ਜੋ ਰਹੀ ਨਾਲ ਸਤਨਾ ਕਰਦੀ ਕੋਈ ਉਹਦੇ ਉਲਟੇ ਉਪਦੇਸ਼ ਕਰੀ ਜਾਵੇ ਉਹ ਡੋਲਦਾ ਹੀ ਨਹੀਂ ਜੇ ਰਹਿਣ। ਉਹਨੇ ਤਲ ਜਿੱਦੀ ਘੜਦੀ ਹੋਈ। ਉਹਦੀ ਅਵਸਥਾ। ਡੋਲੇ ਰਹੂ। ਉਹਨੇ ਸ਼ਰਤਾਂ ਨਹੀਂ ਪੈ ਸਕਦੀ ਵੀ ਤੈਨੂੰ ਸ਼ਬਦ। ਤੇਰੀ ਸੁਰਤ ਸ਼ਬਦ ਨਾਲ ਨਹੀਂ ਜੁੜੂ। ਮੈਂ ਮਿਲੂ। ਕਿਤੇ ਅਵਸਥਾ ਹੋਏ ਕਿ ਸ਼ਬਦਾਂ ਦੀ ਘੜੀ ਤਾਂ ਸੰਕਾ ਕੋਈ। ठीक है जी सच है ता चक चक मरे सब लुकाई निंदका के मुंह काले करे हर करते आप बधाई सच साहिब सतगुरु कै बल है मेरा साके साहिब है लो हां जी साके सब ਸਤਿਗੁਰੂ ਕੋਲ ਵੱਲ ਹੈ ਸਤਿਗੁਰ ਦੇ ਨਾਲ ਖੜਾ ਹੈ ਸਤਿਗੁਰੂ ਦੇ ਨਾਲ ਹੈ ਉਹ ਚੱਖ ਚੱਕ ਮਰੇ ਸਭ ਲੁਕਾਈ ਕੋਈ ਗੁਰੂ ਉਹਦੇ ਨਾਲ ਖੜਾ ਹੈ ਪਰਮੇਸ਼ਰ ਉਹਦੇ ਨਾਲ ਖੜਾ ਹੈ ਅੰਦਰ ਪ੍ਰਗਟ ਹੈ ਬੁਲਾਇਆ ਬੋਲਦਾ ਉਹਦਾ ਕੀ ਬਗੜ ਸਕਦਾ ਕੁਛ ਨਹੀਂ ਕੋਈ ਬਗਾਨ ਸਕਦਾ ਉਹਦਾ ਜਿਹੜਾ ਬੁਲਾਇਆ ਬੋਲਦਾ ਹੈ। ਹਾਂਜੀ। ਸੱਚ ਸਾਹਿਬ ਜਿਹੜਾ ਇਹ ਮੂਲ ਵਾਸਤੇ ਕਿਹਾ ਫਿਰ ਸੱਚ ਸਾਹਿਬ ਸਤਿਗੁਰੂ ਕੇ ਵੱਲ ਹੈ। ਸੱਚ ਦਾ ਸਭਨਾ ਕੋ ਖਸਮ ਹੈ। ਅੱਛਾ ਜੀ। ਸੱਚ ਸਾਹਿਬ ਜਦ ਬਣਦਾ ਜਦ ਉਹਦਾ ਹੁਕਮ ਚੱਲਦਾ ਅੱਛਾ ਜੀ। ਸਾਹਿਬ ਜਦ ਆਗਮ ਬੇ ਨਾਲ ਹੈ ਸੱਚ ਤਾਂ ਹੈ ਉਹ ਹੈ। ਉਹਨਾਂ ਹਾਕਮ ਨੇ ਉਹ। ਅੱਛਾ ਜੀ। हां हुक्म सहेत या सत्य साहेब है हुक्म सहेत है हुक्म भी है के मुंह काले करे हर करता आप बधाई निंदक ने मुंह करे निंदक ने मुंह अपने काले कर जाता है जिन्ना ज्ञान पैदा ਹਰ ਵਰਤੇ ਆਪ ਵਧਾਈ ਹਾਂਜੀ ਐਨੀ ਕਲਾ ਵਧਾਤੀ ਹੈ ਜੀ ਰੋਸ਼ਨੀ ਵਧਾਤੀ ਸੰਸਾਰ ਦੇ ਵਿੱਚ ਐਨਾ ਗਿਆਨ ਵਧਾਤਾ ਸੰਸਾਰ ਦਾ ਕਿ ਦੁਦਕ ਸਾਫ ਦਿਖਣ ਲੱਗੇ ਕਾਲੇ ਨੂੰ ਛੋਟੇ ਗਿਆਨ ਵਾਲੇ ਜਿਹਦਾ ਗਿਆਨ ਬਹੁਤ ਘੱਟ ਹੈ ਇਹ ਵਾਰ ਦੇ ਲਈ ਬਹੁਤ ਕੋਲ ਖੁਸ਼ ਇਹ ਜਿਹੜੇ ਮਹਾਪੁਰਖ ਬਣੇ ਤਾਂ ਜਿਵੇਂ ਸੀਗੇ ਇੱਦਾਂ ਪਤਾ ਲੱਗਿਆ ਪ੍ਰਗਟ ਹੋ ਗਏ ਲੋਕਾਂ ਦੇ ਸਾਹਮਣੇ ਇਹ ਕਾਲੇ ਬੂਟਾ ਮਤਲਬ ਇਹ ਹੈ ਉਸ ਜਿਹੜੀ ਕਾਲੀ ਕਰ ਦਿੱਤਾ ਪੋਤ ਨਹੀਂ ਦਿੱਤੇ ਉਹਨੂੰ ਦੇ ਬੂਟਾ ਲੈ ਕੇ ਕਾਲਾ ਨਹੀਂ ਉਹਨਾਂ ਦਾ ਜਾਨ ਘੱਡਿਆ ਗਿਆ ਨਹੀਂ ਹੋ ਗਿਆ ਇਹਨਾਂ ਕੋਲ ਘੱਡਿਆ ਗਿਆ ਜਿਉਂ ਨਿੰਦਕ ਨਿੰਦ ਕਰੈ ਉਹ ਤੋ ਨਿਤ-ਨਿਤ ਚੜੈ ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ ਜੋ ਜੋ ਨੰਨਤ ਗੰਨਤ ਦਾ ਕਰੇ ਛੁਰੂ ਛੁਰੂ ਜੰਨਤ ਗੰਨਤ ਦਾ ਕਰਦੇ ਤੇ ਜਿਵੇਂ ਲੈਣ ਕੀ ਕੀ ਕਹਿੰਦੇ ਨੇ ਇਹ ਕੀ ਗੱਲ ਹੋਈ ਇਹ ਤਾਂ ਕੋਈ ਸਾਰੀ ਦੁਨੀਆ ਹੀ ਝੂਠੀ ਹੈ ਸਾਰੀ ਦੁਨੀਆ ਹੀ ਉਲਟਾ ਇਹ ਗੁਰਬਾਤ ਸਾਰੇ ਬੁਸਾਤੇ ਉਲਟਾ ਹੈ ਇਸ ਆਖ਼ਤਾਂ ਤੇ ਸਾਰਿਆਂ ਤੇ ਉਲਟਾ ਸਾਖਤ ਸਿੰਘ ਕਰ ਰੂਟੀ ਰਹੇ ਸ਼ੁਰੂ ਸ਼ੁਰੂ ਜਾਂ ਲੱਗਦਾ ਵੀ ਸਾਧੀਆਂ ਮੁੱਤਾਂ ਖੱਡਣ ਗੱਲੀਆਂ ਨੇ ਕਿਉਂ-ਕਿਉਂ ਦਾ ਵਿਰੋਧ ਕਰਦੇ ਨੇ ਨਾ ਪਹਿਲਾਂ ਪਹਿਲਾਂ ਕਿਉਂ ਕਿਉਂ ਨਿੱਤ ਦਿੱਤਾ ਜਿਹੜੇ ਸਵਾਈ ਕਿਉਂਕਿ ਉਹ ਵੀ ਰੋਸ਼ਨੀ ਰੋਜ਼ ਵਧਾਈ ਜਾਂਦੀ ਐ ਤੇ ਦੂਵੇਂ ਵਰਸ਼ਣ ਨੇ ਇਦੋਂ ਦਿੱਤ ਨਾਮਾ ਗਿਆ ਉਹਦਾ ਸਾਹਿਬੇ ਦਾ ਦਿੱਤ ਨਾਮਾ ਸੂਰਜ ਹੋ ਕੇ ਚੜਦਾ ਹੈ ਉਹਦਾ ਪਿਛਲੇ ਦੇ ਜਵਾਬ ਲੱਭਦੇ ਹੁੰਦੇ ਨੇ ਉਹਨਾਂ ਨੂੰ ਹੋਰ ਚਰਨ ਕਰ ਦਿੱਤਾ ਉਹ ਉਹ ਦੀ ਬੇਵਾਹ ਹੋ ਜਾਂਦੀ ਜੇ ਹੱਥ ਖੜੇ ਕਰ ਦਿੰਦੇ ਜਨ ਨਾਨਕ ਹਰ ਆਰਾਧਿਆ ਤਿੰਨ ਨਾਨਕ ਹਰ ਰਾਧਿਆ ਨਾਨਕ ਜਿਨ੍ਹਾਂ ਨੇ ਹਰ ਰਾਦ ਲਿਆ ਚਪੈਰੀ ਹੋਲ ਛਪਾਈ ਜਿਨ੍ਹਾਂ ਨੇ ਹਾਦੂ ਹਰ ਰਾਦ ਲਿਆ ਜਾਣ ਲਿਆ ਉਹ ਸਭ ਫੜタル ਵੀ ਛੱਡ ਕੇ ਸੁਨਸਾਈ ਹੋ ਜਾਂਦੇ ਪੈਰੀ ਭਾਈਆਂ ਕਹਿੰਦੇ ਨਹੀਂ ਭਈ ਇਹ ਗੱਲ ਸੱਚ ਹੈ ਸੱਚ ਹੈ ਸੱਚ ਸੱਚੇ ਹੁੰਦਾ ਸੱਚ ਨਾਲ ਟਕਰਾਉਂਦੀ ਹੋ ਸਕਦਾ हां ਠੀਕ है पर आप इस बात को सच समझदे सी जिदा चल रही थी क्या असल सच ए है और वो सच घट गया वो भी छोड़ दियो आ वधिया सच है, है जेड़ा पूरी रोशनी वाला सच है नु अपना लो <laughs> एक की तौहीद रबदे दा सच नु आते जे वधिया सच लग गया ताडीया छोड़ दियो ठीक है थे बदल लए थे थे ਠੀਕ ਹੈ ਜੀ ਫਿਰ ਇਸ ਗੱਲ ਨੂੰ ਮੰਨ ਕੇ ਪੈਰੀਂ ਪੈ ਜਾਂਦੇ ਹਾਂ ਜੀ ਉਹ ਪੈੜ ਦੇ ਵਿੱਚ ਪੈਰ ਰੱਖ ਲੀ ਹਾਂ ਹਾਂ ਠੀਕ ਹੈ ਜੀ ਆ ਪਿੱਛੇ ਲੱਗ ਜਾਂਦਾ ਹੈ ਮਹੱਲਾ ਚੌਥਾ ਸਤਗੁਰ ਛੇਤੀ ਗਣਤ ਜੇ ਰਾਖਾ ਹਲਤ ਪਲਤ ਸਭ ਤਿਸ ਕਾ ਗਿਆ ਪਾਏ ਝੱਗੂ ਸੁਟੈ ਚੱਕ ਦਾ ਚੱਕ ਦਾ ਝੜ ਪਿਆ ਸਤਗੁਰਾਂ ਨਾਲ ਜੇ ਕੋਈ ਗਲਤੀ ਰੱਖੇ ਜਿਵੇਂ ਕਹਿੰਦਾ ਨਵੇਂ ਪਲ ਕੱਢੋ ਕੱਢੋ ਸਾਸਾਂ ਦਾ ਇਹ ਕਰੋ ਇਹ ਤਾਂ ਫੇ ਸਤਗੁਰ ਤੇ ਨਾਲ ਗਲਤੀ ਮਿਲਤੀ ਹੋਗੀ ਹਾਂ ਉਹ ਜਿਹੜੇ ਗਲਤੀ ਮਿਲਤੀਆਂ ਗੱਲਾਂ ਕਰਦੇ ਨੇ ਨਾ ਸਤਗੁਰ ਨਾਲ ਗੰਨਸ ਰੱਖਦੇ ਨੇ ਜਿੱਥਾ ਜਰ ਗਲਤੀ ਹੈ ਉਹ ਨਾ ਮੁਕਤੀ ਨਹੀਂ ਹੈ ਵਾਰਿ ਕਪ ਜਨਾਜਲ ਲੇਖਾ ਉਹਨਾਂ ਜਰ ਮੁਕਤੀ ਨਹੀਂ ਹੈ ਆਨੰਤ ਕ ਤਨਕਾ ਲੇਖਾ ਪਾਟਿਆ ਗਿਆਨ ਪੇ ਆਤਮ ਕਰਮ ਵਿਦਵਾਸ ਜਨਾਜਰ ਕਰਮਾ ਉਹਨਾਂ ਹੈ ਜੇ ਕਰਮ ਦਾ ਨਾਸ ਹੋ ਗਿਆ ਕਿਰਤੀ ਕਾਦੀ ਹੈ ਲੇਖਾ ਛੜ ਅਲੇਖੇ ਛੁੱਟੇ ਜੇ ਲੇਖਾ ਛੜ ਦੂਗਾ ਅਲੇਖੇ ਜੋ ਜੋ ਛੁਟਕਾਰਾ ਜਾਦਾ ਹੋਣਾ ਗਣਤੀ ਤਾਂ ਛੁਟਕਾਰਾ ਕਿਤੇ ਲਿਖਿਆ ਹੀ ਨਹੀਂ ਹੋਇਆ ਆ ਸੰਤਾਂ ਦਾ ਵਲਦੀ ਦਾ ਪ੍ਰਚਾਰ ਕਰੀ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਆਈ। ਜਿੱਦਣ ਸਮਝਾਂਣਗੇ ਛੱਡ ਦੇਣਗੇ। ਛੱਡ ਬਰ ਵੇਸ਼ਿੰਗ ਕੋਲ ਤੇ ਜੇ ਰੱਖਣਾ ਹਲਪਲ ਸਭ ਇਸका ਗਿਆ ਆ ਲੋਕ ਦੋਏ ਕਿਲੇ ਗਏ ਉਹਦੇ। ਧਿਆਨ ਨਾਲ ਸੁਣ ਲੈਣ ਜਿਹੜੇ। ਦਸਵੰਦ ਦੀ ਗੱਲ ਕਰਦੇ ਨੇ ਸਾ ਦਾ ਦਸਵੰਦ ਉਹਨਾਂ ਵਾਸਤੇ ਪੰਪੀ ਹੈ ਹਲਤਪਲਤ ਉਹਨਾਂ ਦਾ ਚੱਲਿਆ ਗਿਆ ਦੂਏ ਦੂਤੀ ਸਿੱਖਿਆ ਤਣ ਕੇ ਜੇ ਤਾਂ ਇਹਨਾਂ ਦੀ ਮਗਰੋਂ ਉਹਦਾ ਵੀ ਹਲਤਪਲਤ ਚੱਲਿਆ ਜਾਊ ਗੁਰਬਾਨੀ ਵੀ ਸਿੱਖਿਆ ਕੋਸ਼ਿਸ਼ ਕਰੋ ਜੇ ਪ੍ਰਮੇਸ਼ਰ ਦੀ ਬਾਣੀ ਹੈ ਸਿਆਣੇ ਲੋ ਬਣੋ ਜੇ ਤੇ ਚਈਆ ਸੁਟੇ ਚੱਕਦਾ ਚੱਕਦਾ ਝੜ ਪਿਆ ਧਗਧਗ ਧਕ ਧਕ ਪਿਆ। ਨੱਟ ਤਾਂ ਬੜਾ ਕਿਆਂ ਆ ਪੌਦੇ ਬੜੇ ਚੱਟ ਛੋੜਦੇ ਕਿਉਂਕਿ ਗੱਲਾਂ ਨੇ ਨਾ ਐਨੇ ਕੱਢੋ ਉਹ ਘੱਡੋ ਉਹ ਘੱਡੋ ਤੇ ਬੰਨ੍ਹ ਜਦ ਖਰਾਬ ਆ ਚੱਟ ਛੋੜਦੇ ਵੀ ਸਾਡੀ ਗੱਲ ਰੱਦ ਕਿਉਂ ਕਰਤੀ। ਬੜੇ ਗੁੱਸੇ ਨਾਲ ਆਪਣਾ ਪ੍ਰਚਾਰ ਕਰਦੇ ਕਿ ਯੋ ਲੈ ਲੈ ਫੈਕ ਦੇ। ਚੱਟ ਛੋੜਦੇ ਨੇ। ਇਹ ਇਗਜ਼ਾਮ ਕਰਦੇ ਇਤਿਹਾਸ ਹੈ ਜੀ ਜੋੜਾ ਰਿਜ਼ਲਟ ਕੀ ਹੋਇਆ ਦਿੱਤ ਚੱਕਦਾ ਚੱਕਦਾ ਛੜ ਪਿਆ ਛੜ ਪਿਆ ਛੁੱਟੇ ਅਕਬਰ ਦੇ ਵੱਸ ਦੇ ਆਖਰ ਛੜ ਪਏ ਬਿਲਕੁਲ ਪਚਿਪ ਪਈ ਉਹ ਲੀਕalle ਗਏ ਦੋ ਚਾਰ ਬੰਦੇ ਰਹਿ ਗਏ ਨਾਲ ਬਾਕੀ ਸਭ ਟੁੱਟ ਗਏ ਮੁਰਗਾ ਦੋਲਣ ਨਾਲ ਉਹ ਮੁਰਗਾ ਉਹਨਾਂ ਚੇਤ ਰਾਂਗਾਂ ਜਿਹੜਾ ਮੁਰਗਾ ਤੇ ਮੁਰਗਾ ਤਾਂ ਹੀ ਜਹਾਜ਼ ਹੋ ਜੂਵੇ ਜਿੰਨਾ ਚਿਰ ਬੰਦੇ ਨਾਲ ਰਹਿੰਦੇ ਨੇ ਬਾਕੀ ਸਭ ਛੱਡ ਜਾਂਦੇ ਨੇ ਕਿਉਂ ਆਉਂਦਾ ਜਿਹੜਾ ਸੰਸਤੇ ਛੱਡ ਜੂਵੇ ਆਪੇ ਬਦਲੀ ਬਿਨ ਸਹਾਰਾ ਹੁੰਦਾ ਇਹ ਆਪਣੀ ذات ਤੇ ਤਾਂ ਹੀ ਰਹਿ ਜਾਂਦਾ ਹਾਂਜੀ नित उपाव ਪਾ कर... ज़, ज़, माया ਨਾਲ कारण, अगला ਨਾਲ भी उड़ गया, क्या ਵੀ ਚ ਚੰਦੇ ਸੁੱਟਦੇ ਠਕਦੇ ਚ ਚਖ ਮਾਰਦੇ ਮਲਦੇ ਆ ਕੰਨਸਰ ਜੀ ਸੀ ਉਹਨਾਂ ਦਾ ਸੰਗਤ ਇਕੱਠੀ ਕੀਤੀ ਸੀ ਮਾਇਆ ਵਾਸਤੇ ਸੰਗਤ ਬਣਾਈ ਤੀ ਉਹਨਾਂ ਕੋਲ ਰੋਸ਼ੜ ਆਵਾਜ਼ ਲੈਂਦੇ ਤੇ ਖੁੱਦ ਤੇ ਜੇ ਤੋਪਾਪ ਕਰੇ ਮਾਇਆ ਤਾਂ ਕਾਰਨ ਆਵਾਜ਼ ਮਾਇਆ ਤਾਂ ਕਾਰਨ ਲੋਕ ਕੀਤੇ ਤੇ ਠਗਣ ਕੋਸਲਸਾਰ ਅਗਲਾ ਬਾਪੀ ਉੱਡ ਗਿਆ ਜਿਹੜਾ ਅਗਲਾ ਆਸ ਉਹ ਬੰਦ ਹੋ ਗਿਆ ਜਿਹੜਾ ਕੋਹਣਾ ਦਾ ਨਾ ਹੋਰ ਸੰਤਤ ਜੋੜਨੀ ਸੀ ਆ ਦੇੜੀ ਸੀ ਸੰਤ ਤੇ ਪਿਛੇ हट ਗਈ ਅਗਲਾ ਸੰਤ ਵੀ ਉੱਡ ਗਿਆ ਉਹ ਗਿਆਨ ਵੀ ਉੱਡ ਗਿਆ ਤੇ ਝੂਠ ਹੈ ਉਹਦੇ ਆਸਰੇ ਪੈਸੇ ਆਉਂਦੇ ਤੇ ਉਹਦੇ ਆਸਰੇ ਮਾਇਆ ਆਉਂਦੀ ਉਹ ਦੋ ਹੀ ਉੱਡ ਗਏ ਕਿਆ ਉਹ ਖੱਟੇ ਕਿਆ ਉਹ ਖਾਵੇਂ ਇਸ ਅੰਦਰ ਸਹਿਸਾ ਦੁੱਖ ਪਿਆ ਜਿਹਦੇ ਅੰਦਰ ਪੈਦਾ ਹੋ ਗਿਆ ਕੀ ਉਹ ਘਟਣ ਦੇ ਕਿਉਂ ਨਹੀਂ ਘੋੜੇ ਹੱਡੂ ਦਾ ਤਾਂ ਜਿਵੇਂ ਸ਼ਬਦ ਗਿਆਨ ਕਿਥੋਂ ਆਵੇ ਗਿਆਨ ਦਾ ਸ਼ਬਦ ਵਿਚਾਰ ਜਿਹਾ ਸੀ ਉਹ ਤਾਂ ਉਹਦਾ ਵਿਰੋਧ ਕਰਦਾ ਆਵੇ ਤੇ ਜੋ ਪੜਿਆ ਹੈ ਸਾਖੀਆਂ ਕਰਾਉਣ ਦਾ ਝੂਠੀ ਸੀ ਜੋਨੇ ਧਰਮ ਨਾਲ ਸੌਦਾ ਦਾ ਹਸਲਾ ਝੂਠ ਸੀ ਉਹ ਸਭ ਹੋ ਗਿਆ ਖੱਟੂ ਕੀ ਇਹ ਤੋਂ ਬਾਬ ਕਰੇ ਭਾਇਆ ਤਰ ਕਰਨ ਅਗਲਾ ਢੱਪੀ ਉੱਠ ਗਿਆ ਕyao ਖੱਟੇ ਕyao ਖਰੇ ਖਾਵਣ ਕਿਸ ਪਿਆ ਉਹਨਾਂ ਅੰਦਰ ਚਿੰਤਾਰ ਦੁੱਖ ਵਿਆਪ ਗਿਆ ਜੇ ਮੇਰਾ ਹੁਣ ਕੀ ਬਣੂ ਅਪਲਾਈ ਫਿਰ ਕਰ ਪਈਓ ਠੀਕ ਜੀ ਨਾਲ ਵੈਰ ਰਚਾਏ ਸਭ ਪਾਪ ਜਗਤੇ ਕਾ ਤਿੰਨ ਸਿਰ ਲਿਆ ਉਸ ਅੱਗੇ ਪਿੱਛੇ ਢੋਹੀ ਨਾਹੀ ਜਿਸ ਅੰਦਰ ਨਿੰਦਾ ਮੂੰ ਅੰਬ ਪਿਆ ਜੇ ਨਾਲ ਜੇ ਬਾਵਤਾਂ ਸਭ ਪਾਪ ਜਗਤੇ ਦਾ ਤਿੰਨ ਸਿਰ ਪਿਆ ਆਜਰਾ ਦਾ बुरा ਕੀਤਾ ਇਹ ਪਾਪ ਝੁਮਲੇ ਲੈ ਲਿਆ ਉਹਨਾਂ ਦੇ ਖਤਾਂ ਨੂੰ ਗਲਤ ਸਿੱਖਿਆ ਦੇ ਕੇ ਜਿਹੜਾ ਸੰਸਾਰ ਦਾ ਨੁਕਸਾਨ ਕੀਤਾ ਉਹ ਸਾਰੇ ਜਗਤ ਦਾ ਪਾਪ ਆਪਣੇ ਿਰਤੇ ਲੈ ਲਿਆ ਜੇ નિર્ਵਾਇਨਾ ਫੈਲ ਚਉਂਦੇ ਤੇ ਉਹਨਾਂ ਵੀ ਦਰਕੰਦੇ ਅਧਕਾਰੀ ਹੋ ਗਏ ਪੇਸ਼ ਦਿਖਾਇਓ ਜਗਤ ਕੋ ਲੋਗਨ ਕੋ ਆਏ ਵਿਚਾਰੇ ਦੂਏ ਤਾਂ ਬਚ ਗਏ ਸੁਣਨ ਵਾਲੇ ਗੁਨਾਹਾਂ ਦੀ ਬਗੜਿਆ ਕੁਛ ਵੀ ਇਹਨਾਂ ਦਾ ਰਹਿ ਗਈ ਅੱਖ ਦੀ ਉਪਦੇਸ਼ ਕਰਨ ਵਾਲਿਆਂ ਦਾ ਤਾਂ ਅੱਖ ਰਹਿ ਗਈ ਚ ਪੜਾ ਰਹੇ ਸੀ ਇਹਨਾਂ ਨੂੰ ਤਾਂ माफी ਹੈ ਉਹਨਾਂ ਨੂੰ माफी ਹੈ ਦੀ ਤਾਂ ਕੱਪ ਉਹਨਾਂ ਦੇ ਅੰਦਰ ਸੀ ਕੱਪ ਇਹਨਾਂ ਦੇ ਅੰਦਰ ਨਹੀਂ ਸੀ ਉਸ ਅੱਗੇ ਪਿੱਛੇ ਤੋੜੀ ਰਾਣੀ ਜਿਸ ਅੰਦਰ ਵਿੱਦਾ ਉਹ ਰੁੱਪ ਪਿਆ ਇਹਦੇ ਬੂਦੇ ਬਿਚੇ ਰੂਪੀ ਅੰਬ ਪਿਆ ਜਾਂਦਾ ਜੇ ਮੈਂ ਆਪ ਕੋਈ ਆਪਾਂ ਖਾਣੇ ਚੁਪ ਦੇ ਉਹ ਜੋ ਰਸ ਹੁੰਦਾ ਜਿੱਦਾਂ ਲੱਗਦਾ ਹੋ ਦਿੱਤਿਆ ਲਈ ਅੰਬਾ ਉਹ ਚੁਪਦੇ ਰੋਜ ਦਿੱਤਿਆ ਕਰ ਉਹ ਜੋ ਰਸ ਉਹ ਵਿਆਨ ਦਾ ਅੰਬ ਨਹੀਂ ਸੀ ਜੇ ਕਾਮਦ ਹੋਆ ਹੁੰਦਾ ਤਾਂ ਪੱਕਣ ਲੱਗਿਆ ਆਂ ਫਲ ਦੇ ਫਲੜ ਉਹ ਗੁਰ ਧਿਆਨ ਪਦਾਲ ਦਾ ਅੰਬ ਨਹੀਂ ਸੀ ਦੰਦਿਆ ਨਾਲ ਬਸੀ ਪਾਇਆ ਦਾ ਅੰਬ ਸੀ ਇਹ ਦਰਤਾਂ ਨੂੰ ਲੈ ਜਾਂਦਾ ਇਹ ਗੁਣਾਂ ਨੂੰ ਗਾੜ ਵਾਲਾ ਅੰਬ ਸੀ ਉਹ ਗੁਣ ਪੈਦਾ ਕਰਨ ਵਾਲਾ ਹੁੰਦਾ हां जी जे सोने नु ओ हाथ पाए ता खेहू सेती रल गया जे गुरकी शरणि फिर ओ आवे ता पछले औगन बख्श ले जे सोने नु भी हाथ पौंदे ने ओखे वड़ला ना बेटी बन जांदा है जे कमाई करदे ने सोने नु भी हाथ पौंदे ने ਆ ਉਗਣੇ ਕੋਲ ਰਹਿ ਗਏ ਆ ਉਗਣੇ ਉਗਣ ਰਹਿ ਗਏ ਕੋਲ ਜੇ ਗੁਰਤੀ ਪਿਛਲੇ ਉਗਣ ਪਛਲੇ ਆ ਪਰ ਜੇ ਗੁਰਕੀ ਛੱੜੀ ਆ ਜਾ ਫਿਰ ਵੀ ਇਹਨਾਂ ਕੁਝ ਕਰਕੇ ਵੀ ਉਹ ਪਿਛਲੇ ਉਗਣ ਵਖਰੇ ਜਾ ਸਕਦੇ ਨੇ ਵਖਰੇ ਜਾਇਆ ਕਰਦੇ ਨੇ ਸ਼ਰਨ ਆਏ ਇਸ ਘਰ ਛਲਾਏ ਜਨ ਨਾਨਕ ਅਨੰਦਿਨ ਨਾਮ ਧਿਆਇਆ ਹਰ ਸਿਮਰਤ ਕਿਲਵਿਕ ਪਾਪ ਗਿਆ ਜਨ ਨਾਨਕ ਕਹਿੰਦਾ ਜਦ ਨਾਮ ਉਹਨੂੰ ਫੇਰ ਜਿਹੜੇ ਆਏ ਨਾ ਸ਼ਰਨ ਗੁਰ ਬੇਮੁਖ ਚਾ ਰਾਤ ਕਿਹਾ ਜੋੜਿਆ ਫੇਰ ਫੇਰ ਕਿਲਵਿਕ ਪਾਪ ਉਹਨੂੰ ਦਾ ਬਚ ਗਿਆ ਜਿਹੜੀ ਕਲਪਨਾ ਸੀ ਨਾ ਆ ਹੀ ਫੇਰ ਉਹ ਵੀ ਪਾਣੀ तो कब बचा है केवल पाप तर भी दूर हो गया ठीक तू है सच्चा सच तू शब्दों ऊपर तू दीवान जो तुद सच ध्यान दे सेवन सच्चे तेरा मान तू है सच्चा तू तो सच्चा है ताकि तुम तो आप सच ਆਪ ਦੇ ਸੱਚ ਹੈ ਤੂੰ ਤੇ ਸੱਚਾ ਤਾਂ ਸੱਚ ਵੀ ਤੂੰ ਹੀ ਹੈ ਸੱਚ ਤੋਂ ਸ਼ਬਦੋਂ ਉੱਪਰ ਤੂੰ ਦੀ ਬਾਣ ਸ਼ਬਦ ਤੋਂ ਉੱਪਰ ਤੇਰਾ ਹੁਕਮ ਹੈ ਤੇਰਾ ਹੁਕਮ ਸ਼ਬਦ ਤੋਂ ਉੱਪਰ ਹੈ ਇਹ ਗੱਲ ਹੁਣ ਇੱਥੇ ਪਰਮੇਸ਼ਰ ਆਉਂਦੀ ਪਰਮੇਸ਼ਰ ਕੋਈ ਜਾਰੀ ਹੈ ਜੀ ਨਾ ਨਾ ਸੱਚ ਉਹ ਸੱਚ ਜਬ ਨਾ ਖਸਮ ਸਾਈ ਤੋਂ ਉੱਪਰ ਤਾਂ ਕੁਛ ਹੈ ਹੀ ਨਹੀਂ ਠੀਕ ਹੈ ਕਿ ਤੂੰ ਹੈ ਸੱਚਾ ਸੱਚ ਤੂੰ ਸ਼ਬਦ ਉੱਪਰ ਤੂੰ ਦੀ ਬਾਣ ਜੋ ਤੁਦ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਣ ਸੱਚ ਸੇਵਨ ਸੱਚ ਦੀ ਸੇਵਾ ਕਰਦੇ ਆ ਤੇਰੇ ਤੇ ਸੱਚੇ ਤੇ ਉਹਨਾਂ ਨੂੰ ਗੌਰ ਹੁੰਦਾ ਈ ਹੈ ਤੇਰੇ ਤੇ ਹੀ ਮਾਣ ਮਾਨ ਤੂੰ ਮਾਨ ਦੇ ਮਾਨ ਮੇਰਾ ਸਵਾਦੀ ਬੇਟੂ ਤਾਂ ਅਰਦਾਸ ਠੀਕ ਹੈ ਤੇਰੇ ਤੇ ਹੀ ਮਾਣ ਕਰਨਾ ਤੇਰਾ ਮਾਣ ਠੀਕ ਹੈ ਜੀ ਸੇਵਾ ਤੇਰੀ ਸੇਵਾ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਤੇ ਭਗਤ ਜਿਨਨੀ ਗੁਰਮੁਖੀ ਸਹਲਾਇਆ ਸੱਚ ਸ਼ਬਦ ਨੀ ਉਹਨਾਂ ਅੰਦਰ ਸੱਚ ਉਹਨਾਂ ਦੇ ਅੰਦਰ ਸੱਚ ਹੈ ਉਹ ਨੇ ਸੱਚ ਬੋਲਣਾ ਸੱਚ ਬੋਲਦੇ ਨੇ ਸੱਚੇ ਤੇਰਾ ਤਾਂ ਸੱਚ ਦੀ ਸ਼ਕਤੀ ਆ ਨਾਲ ਕੋਲ ਸੱਚ ਦੀ ਸ਼ਕਤੀ ਹੈ ਤੇਰੀ ਉਹ ਸ਼ਕਤੀ ਹੈ ਉਹਨਾਂ ਕੋਲ ਜੇ ਤੇਰੀ ਸ਼ਕਤੀ ਹੈ ਤੇਰੀ ਬੁੱਧੀ ਹੈ ਉੱਤੇ ਕੌਣ ਖੜ ਸਕਦਾ ਉਹਦੇ ਉੱਤੇ ਨacti ਬੁੱਧੀ ਨੂੰ ਕਹਿੰਦੇ ਨੇ ਬੁੱਧਵਲ ਤੇਰਾ ਬੁੱਧਵਲ ਹੈ ਉਹਨਾਂ ਕੋਲ ਵਿਵੇਕ ਬੁੱਧ ਹੈ ਵਿਵੇਕ ਬੁੱਧੀ ਹੈ ਵਿਵੇਕਾ ਉਹਨਾਂ ਕੋਲ ਉਹਦੇ ਬੁੱਧੇ ਕੌਣ ਦੇਖ ਸਕਦਾ ਤੇਰਾ ਤਾਂ ਉਹਨਾਂ ਕੋਲ ਠੀਕ ਭਗਤ ਜੀ ਗੁਰਮੁਖ تعالਿਆ ਭਗਤ ਕੌਣ ਨੇ ਇਹ ਗੁਰਮਖਾਂ ਦੇ ਤੇਰੀ ਸਿਫਸਲਾ ਕੀ ਹੋ ਬਖਸ਼ਰੇ ਗੁਰਮਖ ਰਿਹਾ ਹੋ। ਰਬ ਸ਼ਬਦ ਦੇ ਨਿਸ਼ਾਨੂ ਉਹਨਾਂ ਦਾ ਨਿਸ਼ਾਨੀ ਆ। ਸ਼ਬਦ ਉਹਨਾਂ ਦਾ ਨਹੀਂ ਚਲਦਾ। ਮਾਦਾ ਸ਼ਬਦ ਦਾ ਰਿਹਾ ਉਪਦੇਸ਼ ਹੈ ਇਹ ਹੀ ਦਸਾਨ। ਇਹ ਹੀ ਉਹਨਾਂ ਦਾ ਕੌਤਸ ਹੈ। ਆ ਜਿਹੜਾ ਸ਼ਬਦ ਹੈ ਨਾ ਗੁਰਬਾਣੀ ਇਹ ਦਸਾਨ ਉਹਨਾਂ ਦਾ ਏ ਨਾ ਖਾਤਰ ਠੀਕ ਹੈ ਜੀ ਆ ਬਾਣੀ ਉਹ ਰਾਤ ਹੈ ਇਹਦੇ ਵਿੱਚ ਵੇਦ ਹੈ ਗਿਆਨ ਹੈ ਸੇ ਭਗਤ ਜਿਨਿ ਗੁਰਮੁਖ ਸਹਲਾਇਆ ਕਹਿਣ ਤੋਂ ਭਾਵ ਕੀ ਬਣਦਾ ਕਿ ਨੇ ਗੁਰਮੁਖ ਹੋ ਕੇ ਸਹਲਾਇਆ ਤੈਨੂੰ ਉਹ ਭਗਤ ਬਣੇ ਹੈ ਜੀ ਗੁਰਮੁਖ ਵੀ ਹੋਈ ਨੇ ਭਗਤ ਵੀ ਹੋਈ ਤੇ ਅੱਛਾ ਜੀ ਗੁਰਮੁਖੀ ਤਾਂ ਫੈਦੇ ਨੇ ਕੇ ਬਲਾਏ ਬੋਲੇ ਨੇ ਹੋ ਆਪਣੇ ਵਗੀ ਨਾਲ ਹੀ ਬੋਲੇ ਅੱਛਾ ਜੋ ਜਿਵੇਂ ਤਾ ਬੁਲਾਇਆ ਉਹ ਬੋਲੇ ਠੀਕ ਹੈ ਸੱਚ ਜੇ ਸੱਚੇ ਸੇਮ ਦੇ ਤਿੰਨ ਵਾਰੀ ਸਤਿਗੁਰੂ ਬਾਣ ਸੱਚ ਜੇ ਸੱਚੇ ਜਿਹੜੇ ਸੱਚੇ ਨੂੰ ਸੇਵਦੇ ਨੇ ਉਹ ਸੱਚੇ ਨੇ ਆਪ ਵੀ ਸੱਚ ਦੇ ਰੂਪ ਨੇ ਸੱਚ ਜੇ ਜਿਹੜੇ ਤੇਰੀ ਸੇਵਾ ਕਰਦੇ ਨੇ ਤੇਰੇ ਵਰਗੇ ਤੇ ਤੇਰੀ ਦਰਗਾਹ ਜੋ ਪ੍ਰਵਾਨ ਨੇ ਤਿੰਨ ਵਾਰੀ ਸਤ ਗੁਰੂ ਬਾਣ ਆਜੋ ਸਭਨਾ ਕੁਰਬਾਨਿਆਂ ਨਾਲ ਵਾਰੀ ਜਾਂਦ ਠੀਕ ਹੈ